ਸਤਗੁਰ ਸੇਵੈ ਸੇਵਡ ਭਾਗੀ ਹਉਮੈ ਮਾਰ ਸੱਚ ਲਿਵ ਲਾਗੀ ਸਤਗੁਰ ਸੇਵੈ ਸੇਵਡ ਭਾਗੀ ਜਿਹੜੇ ਸਤਗੁਰ ਦੀ ਸੇਵਾ ਕਰਦੇ ਨੇ ਉਹ ਭੜ ਭਾਗੀ ਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤਲਾਏ ਪਰ شرط ਇਹ ਹੈ ਜਿਤਲਾਕੇ ਕਰੇ ਇੱਕ ਮਾਨੇ ਕਿਤ ਗੁਰਕੀ ਕੀ ਸੇਵਾ ਸ਼ਬਦ ਵਿਚਾਰ ਜਿਹੜਾ ਸ਼ਬਦ ਵਿਚਾਰ ਕਰਦੇ ਨੇ ਗੁਰਬਾਣੀ ਵੀ ਵਿਚਾਰ ਕਰਦੇ ਨੇ ਉਹ ਮੜ ਭਾਗੀ ਨੇ ਹਉਮੈ ਮਾਰ ਸੱਚਲੇ ਵਲਾਗੀ ਉਹ ਆਪਣੀ ਹਉਮੈ ਮਾਰ ਲੈਂਦੇ ਨੇ ਹੋ ਕੇ ਲਿਵ ਦੀ ਇੱਕ ਵਾਂਗ ਕਿੱਤ ਹੋ ਜਾਂਦੇ ਨੇ ਆਪਣੇ ਮੂਰ ਨਾਲ ਜੁੜ ਜਾਂਦੇ ਨੇ ਹਾਂਜੀ ਤੇਰੇ ਰੰਗੀ ਰਾਤੇ ਸਹਿਜ ਸੁਭਾਏ ਤੂੰ ਸੁਖਦਾਤਾ ਲਹਿ ਮਿਲਾਇ ਤੇਰੇ ਰੰਗ ਵਿੱਚ ਰੰਗੇ ਜਾਂਦੇ ਨੇ ਸੱਚ ਰੰਗ ਵਿੱਚ ਰੰਗੇ ਜਾਂਦੇ ਨੇ ਤੇ ਸਹਿਜ ਸੁਭਾਅ ਔਰ ਸਹਿਜ ਵਸਤਵ ਦਿੱਟੇ ਜਾਂਦੇ ਨੇ ਤੂੰ ਭਾਏ ਤੂੰ ਅਲੱਗਾ ਤਾਹੇ ਅਲੱਗਾ ਹੈ ਔਰ ਉਹਨਾਂ ਦੀ ਭਾਵਨਾ ਜਿਹੜੀ ਸ਼ੁਭ ਹੁੰਦੀ ਹੈ ਭਾਵਨਾ ਭਾਵਨਾ ਸ਼ੁਭ ਹੋ ਜਾਂਦੀ ਹੈ ਕੋਈ ਮਾੜੰਦ ਭਾਵਨਾ ਉਹਨਾਂ ਦੇ ਅੰਦਰ ਨਹੀਂ ਰਹਿੰਦੀ ਇਹ ਖਿਆਲ ਦਾ ਮਨੁਨੋ ਦਾ ਭਾਵਨਾ ਹੀ ਸ਼ੁਭ ਹੋ ਜਾਂਦੀਆਂ ਨੇ ਭਾਵਨਾ ਚ ਅੰਤਰ ਹੀ ਨਹੀਂ ਰਹਿੰਦਾ ਅੰਤਰ ਖਤਮ ਹੋ ਜਾਂਦਾ ਤੂੰ ਆਪਣੇ ਨਾਲ ਬੁਲਾ ਲੈਣਾ ਫਿਰ ਤੂੰ ਉਹਨਾਂ ਨੂੰ ਨਿਵਾਸ ਦੇ ਦੇ ਆਪਣੇ ਆਪਣੇ ਘਰ ਦਾ ਸੱਚਖੰਡ ਦਾ ਵਾਤੀ ਕਰ ਲੈਣਾ ਨਾਹੀਂ ਮਿਲਾਏ ਆਪਣੇ ਨਾਲ ਮਿਲਾ ਲੈਣਾ ਹਾਂਜੀ ਇੱਕ ਸਤੇ ਦੂਜਾ ਨਾਹੀਂ ਕੋਏ ਗੁਰਮੁਖ ਬੁੱਝੈ ਸੋਜੀ ਹੋਈ ਇੱਕ ਹਸਤੇ ਦੂਜਾ ਨਾਹੀਂ ਕੋਈ ਉੱਥੇ ਜਿੱਥੇ ਬਣਾ ਲੈਣਾ ਤੂੰ ਰਹਿਣਾ ਉੱਥੇ ਸਾਰੇ ਇਤਨੇ ਦੂਜਾ ਹੈ ਕੋਈ ਸਭ ਦੀ ਇਕ ਕੋ ਮੱਤ ਆ ਸਭ ਦੀ ਕੋਈ ਫਰਕ ਨਹੀਂ ਹੈ ਇਸ ਗੱਲ ਨੂੰ ਗੁਰਮੁਖ ਕੋਈ ਵਿਰਲਾ ਗੁਰਮੁਖ বুঝਦਾ ਗੁਰਮੁਖ বুঝੇ ਸੋਜੀ ਹੋਈ ਜਿਹੜਾ ਗੁਰੂ ਬੁੱਝ ਲੈਂਦਾ ਉਹਨੂੰ ਸਾਰੀ ਤਨ ਲੋਕ ਦੀ ਸੋਝੀ ਹੋ ਜਾਂਦੀ ਠੀਕ ਹੈ ਜੀ ਬੁੱਝਣ ਤੇ ਹੀ ਹੈ ਸਾਰਾ ਪੁਰਾਣੀ ਸਾਰੇ ਬੁੱਝਣ ਵਾਲੀ ਸਮਝਣ ਵਾਲੀ ਤਾਂ ਗੱਲ ਹੈ ਉਹ ਸਮਝਣ ਵਾਲੀ ਹੈ ਜਿਹੜੀ ਬੁੱਧੀ ਤੋਂ ਪਰੇ ਗੱਲ ਹੈ ਵਾਲੀ ਹੈ 'ਚ ਲਿਖੀ ਵੀ ਨਹੀਂ ਜਾ ਸਕਦੀ ਇਹ ਕਰਕੇ ਬੁੱਝਣ ਵਾਲੀ ਗੱਲ ਅੱਖਰਾਂ ਦੇ ਬਾਹਰ ਹੈ ਆਈ ਨਹੀਂ ਹੋਈ ਵਿੱਚ ਜਿੰਨੀ ਐਨੀ ਮਰਜ਼ੀ ਹੋਰ ਬਾਣੀ ਲਿਖਦੀ ਹੈ ਤਾਂ ਗੱਲ ਬੁੱਝਣ ਵਾਲੀ ਖੜੀ ਹੈ ਤੇ ਨੌਵੇਂ ਪਰੇ ਦੀ ਸਮਾਪਤੀ ਹੈ ਜੀ ਹਾਂ ਜੀ ਅਖੀਰੀ ਪੜਾਅ ਸ਼ੁਰੂ ਕਰਦੇ ਜੀ 15 37 ਤੈ ਸੱਤ ਵਾਰ ਮਹਾਰੁੱਤੀ ਆਵਹਿ ਵਾਰ-ਵਾਰ ਨੇ ਇਹਦੇ ਵਿੱਚ ਸੱਤ ਵਾਰ ਨੇ ਕਿੱਤਾ ਪਹਿਲਾਂ ਚੱਲੀਆਂ ਗਈਆਂ 15 ਵਾਰ ਸੱਤ ਨੇ ਇਹ ਆਉਂਦੇ ਜਾਂਦੇ ਰਹਿੰਦੇ ਨੇ ਵਾਰ-ਵਾਰ हां आगे माह महीने महीने रुता महीने ये आउंदे ਜਾਂਦੇ ਰਹਿੰਦੇ ਨੇ ਇਹ ਚੈਨ ਚੱਲਦੀ ਰਹਿੰਦੀ ਹਫਤੇ 15 ਦਿਨ ਬਾਅਦ ਉਹ ਫੇਰ ਚਤਵਾਰ ਜਾਂਦੀ ਹੈ ਤੇ ਮਹੀਨਾ ਮਹੀਨੇ ਬਾਅਦ ਬਦਲ ਜਾਂਦਾ ਹੈ ਰੁਤਾ हां जी ਦਿਨ ਸ੍ਰੈਣ ਤੇ ਵੈ ਆ ਦਿਨ ਰਾਤ ਬਣਾਤੇ ਐਵੇਂ ਸੰਸਾਰ ਹੈ ਸੰਸਾਰ ਕੀ ਹੈ ਅਗਿਆਨਤਾ ਦੀ ਰਾਤ ਹੈ ਜਾਂ ਚਾਨਣਾ ਕਿਸੇ ਦੇ ਅੰਦਰ ਜਾਂ ਫਿਰ ਆਏ ਇੱਕ ਵ데 ਚੰਦ ਜਿੰਨਾ ਚਾਨਣਾ ਦੂਜੇ ਚੰਦ ਚਾਨਣਾ ਕਿਸੇ ਨੂੰ ਉਹਦੇ ਨਾਲ ਵੀ ਅਸੀਂ ਮਹਿਸਰਦੇ ਜਿੰਨਾ ਕਿਸੇ ਦੇ ਅੰਦਰ ਰੋਸ਼ਨੀ ਹੈ ਪੂਰਨਮਾਸ਼ੀ ਨੂੰ ਚੰਨ ਨਾਲ ਪੂਰਾ ਹੁੰਦਾ ਪੂਰਾ ਚਾਨਣਾ ਵੱਧ ਤੋਂ ਵੱਧ ਇੰਨਾ ਹੋ ਸਕਦਾ ਪਰ ਸੂਰਜ ਜਿੰਨਾ ਚਾਨਣਾ ਫਿਰ ਵੀ ਨਹੀਂ ਫਿਰ ਵੀ ਰਾਤ ਹੀ ਹੁੰਦੀ ਹੈ ਹਾਂਜੀ ਇਹ ਗਾਏ ਦਿਨ ਤੇ ਵੀ ਫਿਰ ਸ੍ਰਵप्रभात ਚ ਔਰ ਸ਼ਾਮ ਨੂੰ ਘਟ ਹੁੰਦੀ ਲਾਈਟ ਹੈ ਜੀ ਬਿਲਕੁਲ ਬਿਲਕੁਲ ਆਵਾ ਗਾਉਣ ਕੀਆ ਕਰਤਾਰ ਕਰਤਾਰ ਨੇ ਆਵਾ ਗਾਉਣ ਕੀਤਾ ਜਿਵੇਂ ਦਿਨ ਰਾਤ ਆਈ ਜਾਇ ਜਾਂਦੇ ਨੇ ਤਾਂ ਆਈ ਜਾਇ ਜਾਂਦੀਆਂ ਨੇ ਸੂਰਜ ਚੜਦਾ ਛੁੜਦਾ ਇਹ ਜੀਵ ਦਾ ਆਵਾ ਗਾਉਣ ਜੰਮਦਾ ਵਰਦਾ ਹਾਂਜੀ ਨਿਸ਼ਚਲ ਸਾਚ ਰਹਾ ਕਲ ਧਾਰ ਨਾਨਕ ਗੁਰਮੁਖੀ ਬੂਝੈ ਕੋ ਸ਼ਬਦ ਵਿਚਾਰ ਨੇ ਚਲੋ ਆ ਜਿਹੜਾ ਸੱਚ ਆਪਣੀ ਕਲਾ ਦੇ ਵਿੱਚ ਕਲ ਦੇ ਵਿੱਚ ਬੁੱਧੀ ਚ ਛੱਕ ਨੂੰ ਤਾਰਨ ਕਰਕੇ ਰੱਖਿਆ ਹੋਇਆ ਕਲ ਜਿਹੜੀ ਬੁੱਧੀ ਨੂੰ ਵੀ ਕਹਿੰਦੇ ਅਕਲ ਚ ਅਕਲ ਕਲਾ ਭਰਪੂਰ ਰਹਾ ਨੇ ਚਲ ਸੱਚ ਧਾਰ ਜਿਹੜੀ ਅਕਲ ਹੈ ਉਹਦੇ ਵਿੱਚ ਵਸਿਆ ਹੋਇਆ ਸਾਰਿਆਂ ਦੇ ਆਪਣੀ ਅਕਲ ਦੇਨ ਨਾਲ ਸਾਰਿਆਂ ਨੂੰ ਆਪਣੇ ਪਾਸੇ ਰੱਖਿਆ ਹੋਇਆ ਆਪਣੀ ਅਕਲ ਨਾਲ ਸਾਰਿਆਂ ਦੀ ਅਕਲ ਪੂਰੀ ਵੀ ਕਰ ਰਹੇ ਨਾਲ ਦੀ ਨਾਲ ਨਾਨਕ ਗੁਰਮੁਖ ਕੋ ਗੁਰਜੇ ਕੋ ਸ਼ਬਦ ਵਿਚਾਰ ਇਹ ਗੱਲ ਦੇ ਭੇਦ ਨੂੰ ਨਾਨਕ ਕਹਿੰਦਾ ਕੋਈ ਗੁਰਮੁਖ ਸ਼ਬਦ ਵਿਚਾਰ ਕਰੇ ਗੁਰਬਾਣੀ ਦੀ ਵਿਚਾਰ ਕਰੇ ਫੇਰ 부ਝ ਸਕਦਾ ਇਹ ਪੁੱਝਣ ਵਾਲੀ ਗੱਲ ਹੈ ਸਾਹਿਬ ਕਿ ਸਾਡੀ ਬੁੱਧੀ ਨੂੰ ਆਪਣੀ ਬੁੱਧੀ ਨਾਲ ਪੂਰੀ ਕਰ ਲੈ ਉਹਦੀ ਪੂਰਨ ਬੁੱਧਾ ਸਾਡੀ ਅਧੂਰੀ ਬੁੱਧਾ ਬੜੀ ਕਲਾ ਦੇ ਛੋਟੀ ਕਲਾ ਬਸ ਚ ਹੁੰਦਾ ਇਸ ਕਰਕੇ ਸਾਰਿਆਂ ਨੇ ਆਪਣੇ ਬਸਤੀ ਵੀ ਰੱਖਿਆ ਹੋਇਆ ਆਪਣੀ ਅਕਲ ਕਲਾ ਨਾਲ ਸਾਨੂੰ ਆਪਣੇ ਕਾਬੂ ਚ ਵੀ ਰੱਖਿਆ ਹਾਂਜੀ ਠੀਕ ਹੈ ਜੀ ਇੱਥੇ 10ਵੇਂ ਬਿਲਾਵਲ ਮਹੱਲਾ ਤੀਜਾ ਵਾਰ 7 ਘਰ ਜੀ